ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾਵੇ ਤੋਲੇ ਗੁਰਮੁਖੇ ਗੌਂਦਰਾ ਸੱਚ ਰੂਹ ਦਾ ਗੁਰਮੁਖੇ ਗਾ ਸਕਦਾ ਹੈ ਗੁਰਮੁਖੇ ਬੋਲ ਸਕਦਾ ਹੈ ਬਿਆਨ ਕਰ ਸਕਦਾ ਹੈ ਸੱਚ ਰੂਹ ਗੁਰਮੁਖੇ ਤੋਲ ਸਕਦਾ ਸੱਚ ਰੂਹ ਨਹੀਂ ਤੋਲੀ ਜਾਂਦੇ ਨੇ ਸੱਚ ਪੂਰ ਵਾਲੀ ਤੋਲ ਆਪੜੀ ਆਪੜੀ ਪਰਵਾਸਾ ਸਤ ਨਹੀਂ ਟੋਲ ਤਲਾਵਾ ਟੋਲਾ ਲਾਉਂਦਾ ਵੀ ਆ ਦੂਜੇ ਨੂੰ ਵੀ ਦੱਸਦਾ ਵੀ ਇਹਨੂੰ ਇਦੋਂ ਘੱਟ ਸੱਚ ਨਹੀਂ ਆਹ ਜੀ ਅਹ ਚਲੋ ਆਪ ਟੋਲ ਸਕਦਾ ਦੂਜੇ ਨੂੰ ਟੋਲਣ ਨੂੰ ਗੁਰਮੁਖ ਆਵੇ ਜਾਏ ਨਿਸੰਗ ਪਰ ਹਰ ਮੈਲ ਜਲਾਏ ਕਲੰਕ ਗੁਰੂ ਗੋਗਾ ਆਏ ਜਾਏ ਦਸਤ ਗੁਰੂ ਗੋਗਾ ਇੱਕ ਪੈਰ ਸੱਚਖੰਡ ਚੋਂ ਉੱਦਦਾ ਇੱਕ ਪੈਰ ਬਾਇਆ ਚੋਂ ਉੱਦਦਾ ਹੈ ਦ੍ਰਿਸ਼ਟੀ ਉਹ ਦ੍ਰਿਸ਼ਟੀ ਦੂਆ ਪੈਰ ਰਹਿਉਦਾ ਜਦ ਮਾਜੀ ਸਾਹਿਬ ਜੀ ਅਗਲੇ ਵੇਜਾ ਬੁਰਜੀ ਬਾਰ ਚਾਹ ਲਵੇ ਉੱਤੋਂ ਖੜਾਈ ਬਾਹਰ ਚ ਅਗਲੇ ਬਾਰ ਦੀ ਗੱਲ ਦਾ ਅੰਦਰ ਦੇ ਗੱਲ ਦਾ ਅੰਦਰ ਬਾਹਰ ਚ ਦੀ ਕੋਈ ਰੋਕ ਟੋਕ ਨਹੀਂ ਹਾਂ ਆਰ ਮੈਲ ਜਲਾਇਆ ਤਰੰਪ ਮੈਲ ਤਾਂ ਵੀ ਸ਼ੂਦੀ ਆਉਣੀ ਹੈ ਮਾਇਆ ਦੀ ਮੈਲ ਉਹਨੂੰ ਲੱਗਦੀ ਹੋਈ ਤਲਕ ਕੋ ਨੂੰ ਲਗਦਾ ਹੀ ਦਿਮਾਗ ਦੀ ਕਾਲ ਹਛੋਦੀ ਉਹਦੀ ਉਹ ਤਾਂ ਕੋਈ ਨਹੀਂ ਸਕਦੀ ਮਾਇਆ ਅੱਛਾ ਜੀ ਹਾਂ ਜੀ ਗੁਰਮੁਖ ਨਾਦ ਗੁਰਮੁਖ ਗੁਰਮੁਖ ਦਾ ਅਸਲ ਜੀ ਗੁਰਮੁਖੇ ਨਾਦ ਹੈ ਗੁਰਬੀਰ ਬੋਲਦਾ ਉਹੀ ਤਾਂ ਗੁਰਮੁਖ ਦੇ ਆਵਾਜ਼ ਰੂਪੇ ਨਾਦ ਕਹਿੰਦੇ ਨੇ ਅੱਛਾ ਆਵਾਜ਼ ਵਿੱਚ ਇਹ ਵੇਦ ਉਸ ਦਾ ਗਿਆਨ ਹੁੰਦਾ ਹੈ। ਵੇਦ ਗੁਰਮੁਖ ਗੁਰਮੁਖੇ ਵੇਦ ਪ੍ਰਗਟ ਕਰਦਾ ਹੈ। ਵੇਦ ਗੁਰਮੁਖੂ ਗਿਆ ਤਾਂ ਆਪਾ ਬੂੜ ਚਾਰ ਪੈਦਾ। ਜਾਗੋ ਭੇਵਲੇ ਜਾਣ ਤੇ ਪੈਦਾ ਲਿਖਿਆ ਜਪੀ ਗੁਰਮੁਖ ਨਾਦੰ ਗੁਰਮੁਖ ਵੇਦਨ। ਇਹ ਗੱਲ ਹੈ ਜੀ। ਉਹੀ ਗੱਲ ਹੈ। ਗੁਰਮੁਖ ਨਾਦ ਵੇਦ ਦਾ ਸਰਗੁਣ ਸਰੂਪ ਗੁਰਮੁਖ ਹੈ ਤੇ ਵਿਚਾਰ ਦੀ ਨਾਦ ਵੀ ਵਿਚਾਰ ਵੀ ਦੱਸਦਾ ਹੈ ਉਹ ਨਾਦ ਤਾਂ ਵੇਦ ਵਿਚਾਰ ਦੱਸਦੇ ਨਹੀਂ ਉਹ ਤਾਂ ਤੁਸੀਂ ਪੜ੍ਹ ਲਓ ਵਿਚਾਰ ਆਪ ਕਰੋਗੇ ਵਿਚਾਰ ਵੀ ਕਰਦਾ ਹੈ ਵੀ ਹੈ ਵਿਚਾਰ ਵੀ ਕਰਦਾ ਵੇਦ ਰਿਚਾਰੀ ਆਇਆ ਹੈ ਠੀਕ ਹੈ ਜੀ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਮੱਜਨ ਗੁਰਮੁਖ ਜਿਹਨਾਂ ਨੂੰ ਕਰਦਾ ਇਹਨੂੰ ਗੋਲ-ਗੋਲ ਨਾਉਂਦਾ ਗਿਆਨ ਦਾ ਨਹੀਂ ਇਹਦੇ ਕਰਕੇ ਉਹਦਾ ਆਚਾਰ ਚੱਜ ਆਈ ਉਹਿਆ ਪੜੀ ਹਾਂ ਜੀ ਨਾਮ ਨਾਲ ਇਸ਼ਾਨ ਨਾਮ ਨਾਲ ਇਸ਼ਾਨ ਨ ਮੱਜਨ ਕੋ ਕੇ ਕਲੰਕ ਮੈ ਲਾਈ ਹੋਈ ਹੈ ਇਸ ਕਰਕੇ ਉਹਦਾ ਚਲਣ ਸਹੀ ਹੈ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਰ ਗੁਰਮੁਖ ਸ਼ਬਦ ਅਲਮਰਦਾ ਹੈ ਸਾਰ ਗੁਰਮੁਖ ਸ਼ਬਦ ਦੀ ਸਾਰ ਹੈ ਗੁਰਮੁਖ ਗਿਆਨ ਸਾਰ ਨੰਬਰ ਤੇ ਆਉਦਾ ਗਿਆਨ ਨੂੰ ਸਮਝਾਉਂਦਾ ਹੈ ਅੱਛਾ ਜੀ ਜਿਸ ਨੂੰ ਸਾਰ ਸ਼ਬਦ ਕਹਿੰਦੇ ਨੇ ਇਹ ਹਾਂਜੀ ਉਹਦੀ ਉਹਨੂੰ ਸਭ ਜਿਹਾ ਆ ਉਹਦੀ ਆਖਿਆ ਕਰ ਸਕਦਾ ਬੋਲ ਕੇ ਦੱਸ ਸਕਦਾ ਸਮਝਾ ਸਕਦਾ ਸਭੇ ਸਮਝਾਉਣ ਦੀ ਸੁਗਨੱਥਾ ਰੱਖਦਾ ਸ਼ਬਦ ਹੈ ਸਾਰ ਗੁਰਮੁਖ ਗੁਰਮੁਖ ਪਾਵਾ ਪਾਵਾ ਇਸ ਕਰਕੇ ਉਹ ਨੂੰ ਬਾਹਰ ਤੋਂ ਪਰੇ ਜਾਂ ਬੁੱਝੀ ਚਲਾ ਜਾਂਦਾ ਠੀਕ ਹੈ ਜੀ ਉਹ ਬਾਰਾਉਂ ਜਲਦੀ ਬਣਾਈ ਨਹੀਂ ਉਹ ਉਹਨਾਂ ਨੂੰ ਵਿਧੀ ਦਾ ਗਿਆਨ ਠੀਕ ਹੈ